ਕਾਂਗਸੋ ਸਹਾਈ ਜਿਉਂ ਤੋਂ ਆਵੇ ਨਾ ਚੇ ਆਵਣਾ ਚਾਹੀਦਾ ਤੇਰਾ ਸੰਗ ਸਹਾਈ ਆ ਸੱਜਣੀ ਨਾਲ ਸਭ ਲੋੜ ਸਾਈ ਵੀ ਇਹ ਕਹਤਾ ਸੰਗ ਨਾਲ ਹੈ ਆਪਣੇ ਆਪਣੀ ਸਮਾਜੀ ਬੰਦ ਕਰਦੀ ਉਹ ਆਪਣੇ ਦਾ ਭੋਜ ਹੈ ਇੱਕ ਆਪਣੀ ਵੱਧ ਕਰਨਾ ਸਹਾਈ ਕੁਛ ਹੋਈ ਵੀ ਚਾਹਦਾ ਆਪਣਾ ਉਹ ਸੰਗ ਨਾਲ ਦਾ ਲਾਭ ਹੀ ਆਪਣਾ ਜਿੱਥੇ ਆਪਾਂ ਨਹੀਂ ਕੰਮ ਕਰ ਸਕਦੇ ਉੱਥੇ ਸਹਾਤਾ ਉਹ ਕਰਦਾ ਜਿਵੇਂ ਕਿ ਨਿਆਣਾ ਹੈ ਕਿਆ ਬਿਜੁਰ ਕੰ ਉਹ ਚਾਹਦਾ ਨੇ ਕੋਈ ਚੜਾਈ ਕੋਨੇ ਦਾ ਸੁਰਦਾ ਇੱਕ ਸਹਾਇਕ ਹੈ ਸੰਗੀ ਦਾ ਇੱਕ ਦੋਏ ਦਾ ਦੋਏ ਨੇ ਸਹਾਇ ਦਾ ਹੈ ਜਿਹੜਾ ਉਹਦੀ ਵਾਹ ਫੜ ਕੇ ਨਾ ਚੜਾ ਆਪ ਵੀ ਚੜਦਾ ਉਹਦੀ ਵਾਹ ਫੜਦਾ ਸਹਾਇ ਉਹ ਸੰਗੀ ਦਾ ਉਹਦਾ ਉਹਦਾ ਜਿਹੜੇ ਦੋਏ ਕਹਿੰਦੇ ਰਹੇ ਹੈ ਬੜਾ ਜੀ ਇੱਕ ਸੰਦੇ ਸਹਾਇਆ ਇੱਕ ਕੱਲਾ ਸਗੀ ਕਿ ਕਿਸਾ ਸਹਾਇਤਾ ਕਰ ਕੋ ਸਹਾਇਤਾ ਲੈ ਰਿਹਾ ਕਿ ਕਿਸਾ ਸਹਾਇਤਾ ਦੇ ਉਹ ਦੇਣ ਵਾਲਾ ਜਿਹੜਾ ਸਹਾਇਤਾ ਦਿੱਤੀ ਸਾਡਾ ਉਹ ਬਲਕਿ ਉਹ ਜਿਹਾ ਦੇ ਉਹ ਉੱਪਰ ਜਾਂਦੀ ਲੈ ਰਿਹਾ ਬੰਦੇ ਤੋਂ ਸਹਾਇਤਾ ਹੀ ਕਰ ਰਿਹਾ ਫਰ ਜੇ ਕੋਈ ਗੱਲ ਅਗਲ ਤੇ ਵੀ ਹੁੰਦੀ ਫਿਰ ਉਹ ਨੂੰ ਮੋੜਦਾ ਫਿਰ ਉਹ ਅਗਰ ਉਹ ਗੱਲ ਨਹੀਂ ਕਰਦਾ ਉਹ ਵੀ ਵੈਸੇ ਬਸਲ ਬਰੁਣਾ ਨੂੰ ਹੈਗੇ ਜੀ ਕੋਈ ਬਗਾਲ ਲੱਤੇ ਫਿਜੜੀ ਨਾ ਜਾਂ ਫਿਰ ਕਹਿੰਦਾ ਰੱਖ ਲੈ ਯਾਰ ਬੜਾ ਕਿਹਾ ਹੁਣ ਕੀ ਕਰੀਏ ਕੰਮ ਉਹ ਆ ਬੇ ਲੋ ਚੀਜ਼ ਜੇ ਹਰ ਵਾਰ ਚਿੰਤ ਚੌਕਾਤਾ ਨੂੰ ਪੁੱਛੇ ਕਿ ਬਣਾ ਤੁਮ ਕਾਬੂ ਰਹਾ ਹੈ ਕੋਈਸ ਉਹ ਬੇਰਾਂ ਕੋ ਜਦਾ ਕਰਦਾ ਕਬ ਚਾਂਦ ਨੂੰ ਲੱਗਦਾ ਸੋ ਆ ਬੇਰਾਂ ਚੀਜ਼ ਕਿਉਂ ਬੇਰਾਈ ਤਾ ਸੋ ਪ੍ਰੀਤ ਕਿਉਂ ਬੇਰਾਈਆ ਕਿਉਂ ਬੇਰੀਆਂ ਤੋਂ ਬੇਰ ਕਰਦਾ ਉਹਦਾਂ ਪ੍ਰੀਤ ਇਹ ਕੌਣ ਜਾ ਰਿਹਾ ਇਹ ਬੁੱਤੀ ਜਾ ਰਹੀ ਜੋ ਦੂਜਿਆਂ ਜੇ ਨਹੀਂ ਸੋਲ ਨਾ ਉਹ ਉੜ ਜੀ ਹਾਲੇ ਰਹਿ ਗਈ ਕੋਈ ਅਸਲ ਵਿੱਚ ਗੱਲ ਇਹ ਹੈ ਦੁੱਖ ਦਾ ਕਾਹਨ ਜਿਹੜਾ ਸੰਤ ਸਾਹਿਤੋਂ ਤਾਂ ਆਪਣੀ ਜਿੱਤੋਂ ਬਾਧੀ ਹੋਇਆ ਉਹਦਾ ਜੇ ਸਾਡੀ ਰੱਖਿਆ ਪਤਾ ਨਹੀਂ ਰੱਖਿਆ ਜਿਹੜਾ ਮਨ ਵਹਿਰਾਈਆ ਤੇ ਝੋਣਾ ਮਨਾ ਕਰਕੇ ਜਾਂਦਾ ਨਹੀਂ ਜਿਹੜਾ ਨਹੀਂ ਬਚਦਾ ਉਤਿਰਨ ਚੇਤਨਾਤ ਕਰ ਦੋਹਰੋ ਹੋਣ ਨਹੀਂ ਬਠਾ ਜਿਹੜਾ ਨਾਲ ਵਹਿਰਾਈ ਤਾਂ ਹੈ ਇਹਨਾਂ ਫ੍ਰੀਟਸ ਉਸ ਬੁਸਤੀ ਇੱਥੇ ਰਹਿਣਾ ਹੁਣ ਬੰਨ ਕੇ ਦਿੱਤੇ ਵਿੱਚ ਪੈਰਾਈ ਹੋਤੀ ਆ ਕੋਈ ਵੀ ਬਾਹਰ ਕੋਈ ਗੱਲ ਹੀ ਕੋਈ ਨਾ ਨਹੀਂ ਆ। ਮਨ ਬੈਰਾਈ ਆ ਬੜੀ ਬੋਝ ਕੇ ਕਰਦੀ ਕੋਈ ਨਹੀਂ। ਪੈਰਾਈ ਕਰਾਂਗੇ? ਔਗਣ ਬੈਰਾਈ ਨਹੀਂ ਆ ਤੇ ਔਗਣ ਬੰਦ ਲੱਕ ਸਬੂਤ। ਔਗਣ ਤਾਂ ਸਭ ਆ ਦੇ ਵਿੱਚ ਡੱਲ ਲੈ। ਕੋਣ ਔਗਣ ਬੋਦਨਾੜ ਸੁਭਾਅ ਹੈ ਉਹਦਾ। ਔਗਣ ਕੋ ਬਖੀ ਜੀਤੀ ਹੈ। ਔਗਣ ਇੱਕ ਮਨੋਤਨ ਉਹਦੇ। ਔਗਣ ਬਰਸੀ ਦਾ ਵਿੱਚ। ਜਿਹੜੀ ਮਰਜੀ ਦੀ ਬਣੀ ਹੋਈ ਹੈ। ਵਰਤੋਂ ਕੋਈ ਨਹੀਂ ਹੋਈ। ਕੋਈ ਉਹ ਗੰਨ ਹਿਰੇ ਦੁਆਰਾ ਜਿਹੜਾ ਉਹ ਦੀ ਚਮਕਾ ਘੂਰੂਗਾ ਖੇਤੋਂ ਦੀਆਂ ਬਿਮਾਰੀਆਂ ਨੇ। ਉਹ ਬਿਮਾਰੀਆਂ ਨਹੀਂ ਕਹ ਸਕਦੀ। ਦੁਬਾਰਾਈ ਦੋ ਨੇ ਬਿਖਾਵੇ ਹੈ ਬੁੱਧੀ ਵਾਸੂ ਪ੍ਰੇਤ ਇੱਕ ਇੱਕ ਹੈ ਕੋਈ ਪਰ ਵੀ ਇੱਕ ਪਸਾ ਦਾ ਪਰਪਲਾਉ ਦਾ ਇੱਕ ਪਸਾ ਦਾ ਭక్తి ਤੋਂ ਹਾਂ ਆ ਗਏ ਜੀ ਖੱਬੇ ਪਾਸੇ ਆਲਾ ਪਰਪਲਾਉ ਦਾ ਬੋਲ ਅੜ ਬਹਾਲੇ ਨਾਲ ਜੁੜਿਆ ਹੋਇਆ ਹਾਂ ਬਾ ਮੈਂ ਬਖੰਦਾ ਪਰ ਮੈਂ ਜੀ ਗੱਲ ਨਾ ਬਾਦੂ ਸੁਣਦਾ ਕਦੋਂ ਆਏ ਰਹਿੰਦੇ ਆ ਠੀਕ ਹੈ ਸ਼੍ਰੀ ਜੀ ਤੋਂ ਅਰ ਜੀ ਬਰਨਦੇ ਤੋਂ ਮਰੀ ਜਿਵੇਂ ਸਾਕੀਏ ਸੁਣਦਾ ਉਹ ਪਰਪੁਜ ਪਲਾਉਂਦਾ ਉਸਦਾ ਲਾ ਭక్తి ਜਲਾਉਂਦਾ ਸਭ ਤੇਰਾ ਹੁਕਮ ਬਾਦ ਦੋਏ ਹੁਕਮ ਦੇ ਹੁਕਮ ਰੂਪੀ ਹੁਕਮ ਦੇ ਪਰ ਮਰਦੀਦਾ ਹੋ ਗੋ ਰਿਜੇਕਰ ਹੋ ਕੇ ਉਹ ਕੋ ਮੈਂ ਦੋ ਹੈ ਮਨ ਤਾਂ ਦੋ ਗਰ ਕੇ ਫੁੱਲੇ ਫਿਰ ਇੱਕ ਗਰ ਸਭ ਉਹਦਾ ਨਾ ਹੈ ਕਿਤੇ ਗੋ ਦੇ ਇੱਕ ਪਾਸਾ ਬਾਹਲਾ ਛਰੀਰ ਭਰ ਪਲੌਣ ਵਾਲਾ ਅੰਦਰ ਅਸੀਂ ਭਰਤੀ ਕੌਣ ਦਾ ਚਲੋ ਦੋਏ ਬਣ ਕੇ ਇੱਕ ਬਲੇ ਸਰੀਰ ਨੂੰ ਭਗਤੀ ਦੀ ਲੋੜ ਹੈ ਬਾਹਰ ਨੂੰ ਬਾਹਰ ਦੀ ਲੋੜ ਐ ਐਕਚੁਅਲੀ ਬਣਾਉਂਗਾ ਵੀ ਬਾਹਰ ਆ ਉਹਦੇ ਨਾਲ ਇਛਾ ਉਹਦੇ ਬਾਹਲੇ ਨੇ ਇਛਾ ਮਾ ਭਰਪੂਰ ਆਉਣ ਇੱਛਾ ਬੁਖਤੀ ਲੋੜ ਹੁੰਦੀ ਅੱਜ ਲਈ ਸਮਝ ਵਾਲੇ ਨੇ ਕਬਾਦ ਮਥਲੇ ਆ ਰੋਟੀ ਕਾੜ ਦਈਏ ਜਬੂ ਕਬ ਸੋਚ ਵੀ ਦਾ ਕਾੜ ਦਈਏ ਤਲੇ ਗਾਦੇ ਸਾਨੂੰ ਮਜੂ ਜਾਈ ਦੇ ਸੰਗਾ ਦੇ ਬਣਾ ਨਾ ਰੋਟੀ ਦਾ ਖੋਦਿਓ ਜੋ ਬੇਰਾਈ ਤਾਂ ਜੋ ਪ੍ਰੀਤ ਜੋ ਬੇਰਾਈ ਤਾਂ ਨਾਲ ਮੇਰਾ ਪੁੱਠੇ ਦਾ ਬਕਰ ਨਾਲ ਪਾਇਆ ਵੀ ਕਾਹ ਦਈਏ ਨਾ ਜਾਨ ਨੂੰ ਬਹਾਦਰ ਜਮਨ ਘਰ ਜਾਨਦ ਸੱਜ ਜੀ ਜੀ ਜਦੋਂ ਕੀ ਕਹਦਾ ਦੁਸ਼ਮਣਿਆ ਜਿਹੜਾ ਦੁਬੇ ਦੁੱਖ ਦਊਗਾ ਤੇ ਜਮਣਿਆ ਦੁਸ਼ਮਣ ਤੋਂ ਫਿਰ ਦੌੜਦਾ ਬਲੂਆ ਕਿ ਗਰੇਪੀ ਤਰ ਬਸੇ ਬਲੂਆ ਕਹਿੰਦਾ ਕਿ ਤਰ ਬਸੇ ਆਹ ਬਲੂਆ ਰੇਤ ਦਾ ਲੱਗੋ ਤਾ ਦੁ ਜਿਹੜਾ ਰੇਤ ਬਣਾਇਆ ਤੇ ਘਰ ਬਣਾਇਆ ਉਹਦੇ ਤੋਂ ਖੁਦ ਉਹ ਕਹਿੰਦੇ ਪਰਾਂ ਉਹ ਅਜਾ ਦੂਈ ਦਾ ਅੰਗਰ ਪੈਂਦੇ ਦੂਈ ਪੱਤੀ ਬਿੱਤੀ ਰਹਿ ਤਾ ਤੈਸੇ ਹਾਂ ਰਹਿ ਤਾ ਲਮਾ ਹਟ ਲੈ ਜੇ ਤੀ ਗਰੂ ਕਿਹਾ ਆ ਰੇਤ ਖੇਤ ਤੰਦਰ ਰੋਵਲ ਮੇ ਕੋਈ ਨਹੀਂ ਇਹ 20 7 ਉਹ ਨਹੀਂ ਲੱਗਦਾ ਸੋਈਆਂ ਦੀ ਜਿਹੜੀ ਸੋਈਆਂ ਮੈਂ ਸੋਈਆਂ ਚੁੱਕਾ ਬਨੂਆ ਕੇ ਕਰ ਬਿੱਤਰ ਵਸੇ ਆਨੰਦ ਕੇਲ ਮਾਇਆ ਰੰਗ ਰਸੇ ਆਨੰਦ ਨੰਦਕੀਲ ਨੰਦਕੀਲ ਬਾਇਾਨਗਰੋਂ ਸੇ ਅੱਛਾ ਅਨੰਦਕੀਲ ਜੇਸਟ ਸੰਦੀਰ ਅਨੰਦਕੀਲ ਕੀਲ ਉਹਦਾ ਜਿਹੜੇ ਅਜਮਾ ਉਹ ਨੰਦਨਤ ਕੀਲ ਇਹਦਾ ਅਨੰਦਕੀਲ ਦਾ ਕੀਲ ਬਹੁਤ ਚੱਲਦਾ ਨਾ ਕੀਲ ਕਰਿੰਦੀ ਆ ਆ ਹਾਂ ਮਾਜੜ ਖੇਡਾਂ ਨੇ ਨਾ ਤਰ੍ਹਾਂ ਤਰ੍ਹਾਂ ਦੇ ਖੇਡਾਂ ਵਿੱਚ ਦੇ ਰੰਗ ਪਾਉਂਦਾ ਮਾਇਆ ਦੇ ਰੰਗ ਤਾਂ ਬੋਛੜੇ ਜਿਹੜੇ ਅਨਤ ਖੇਲ ਅਲੱਗ ਦੇ ਅਲੱਗ ਹੁੰਦੇ ਨੇ ਮਨਜ਼ਰ ਤਾਂ ਹੋਈ ਸਕਦਾ ਮਾਇਆ ਦੇ ਵਿੱਚ ਦੇ ਵਿੱਚ ਆ ਨਦੀ ਕੋ ਦਾ ਦੱਤੇ ਕੋ ਦਾ ਦੱਤੇ ਨਾ ਨਹੀਂ ਲੱਭਦਾ ਡਾਕਟਰ ਕੋਈ ਨਹੀਂ ਹਾਂ ਨੂੰ ਜਿਹੜਾ ਦਰਦ ਦਾ ਉੱਪਰ ਆਈ ਜੀ ਆ ਸਕਦਾ ਵੈਸੇ ਇਹ ਤਾਂ ਉਸੇ ਵਜ੍ਹਾ ਦੀ ਇਹਨਾਂ ਤਰ੍ਹਾਂ ਅਨੰਦ ਆ ਰਾਂ ਭੰਕੋ ਕਰਨ ਤੋਂ ਹੇਠੇ ਜਾ ਕੇ ਦਰਦ ਦੀ ਕੁ ਬੜੀ ਲੱਗਦੀ ਹੈ ਉਹ ਭਾਇਆ ਦੇ ਨਾਲ ਅਨੰਦ ਜੇ ਮਾਇਆ ਨਾਲ ਅੰਦਰ अनतकेल लखा के संदेह मतलब रद सब से मारा देवते राम से तो ऐसा जिरो या अनतकेल लखा आला नु तात्ता अनतकेल माया रंग रस आ अनतकेल माया रंग रस विरद ही याद अजवंती कह लो ਮਨ ਦੇ ਪਰਦੇ ਇਹੋ ਜਿਹੇ ਸਿਖਿਆ ਦੇ ਦੇ ਇੰਨੇ ਜੋ ਜੀ ਚਾਹੁੰਦੇ ਸੋਚੀ ਜਾਂਦੇ ਹੋ ਉਹ ਵੀ ਉਹਨਾਂ ਪਾਸੇ ਇਹਦਾ ਪਹਿਲਾ ਅੰਦਤ ਯਾਦ ਕੀਤਾ ਅੰਦਤ ਤੇ ਸਕਦਾ ਬੇਅੰਤ ਰੱਬ ਤੋਂ ਇਹ ਕੰਮ ਕਰਦਾ ਰਗ ਤਮਾਸ਼ੇ ਦੇ ਵਿੱਚ ਹੈ ਕੋਈ ਕਿਸੇ ਦਾ ਕੋਈ ਕਿਸੇ ਦਾ ਮਾਇਆ ਰੰਗ ਰਸ ਹੈ ਮਾਇਆ ਅੰਦਰ હજાર ਕਦੇ ਆਦਮੀ ਦੀ ਗੱਲ ਨਹੀਂ ਆਈ ਜਿਵੇਂ ਰਗ ਤਮਾਸ਼ੇ ਕੀ ਹੁੰਦੇ ਆ ਹਾਂ ਮਾਇਆ ਰੰਗ ਰਸ ਸਾਰੇ ਜੀਵਾਂ ਦੀ ਮਾਇਆ ਦੇ ਰੰਗ ਕਿਹਾ ਸਾਰੇ ਜੀਵ ਕੋਈ ਦੇ ਜੀਵ ਤਾਂ ਸਾਰਿਆਂ ਦਾ ਹੀ ਆ ਉਹ ਮਾਇਆ ਦਾ ਰਸ ਹੈ ਸ਼ੁਰੂ ਕਿਥੋਂ ਹੋਇਆ ਕਰਤੂਤ ਪਸ਼ੂ ਕੀ ਮਾਨ ਜਾਂ ਸ਼ੁਰੂ ਹੋਈਆ ਆ ਦੁੱਧ ਪਸ਼ੂ ਇਹ ਤਾਂ ਉਹ ਕਰਤੂਤ ਪਜ਼ੂਕੀ ਨਾਲ ਦਬੋਚ ਰਹਿ ਕੇ ਚੱਲ ਰਿਹਾ ਹੋਊਗਾ ਸਾਰੇ ਇਹ ਸਾਰੇ ਜੀ ਭਾਂਦੇ ਲੱਗੂਆ ਜੀ ਵੀ ਸਾਰੇ ਜਾਨਵਰ ਨੂੰ ਦੇਖ ਕੇ ਜਾਨਵਰ ਬੈਠਾ ਗੱਲ ਕਰ ਪਰ ਹੈ ਉਹ ਜਿਆਦਾ ਕਹਿੰਦੇ ਬੰਗਲਾ ਬੈਠਾ ਖੇਲ ਕਰ ਆ ਜੀ ਹੈ ਦਿਓ ਇਹ ਬਦਲਵਾ ਕੀ ਕਰ ਕਿਵੇਂ ਹਾਂ ਨਰਦਨੀ ਰੋਵੇ ਕੋਈ ਨਹੀਂ ਸਰਦਾਰਾ ਪਾਠ ਕਰ ਅਨੰਤ ਕੇਲ ਮਾਇਆ ਅੰਦਰ ਸ ਹੈ ਅਨੰਤ ਕੇਲ ਮਾਇਆ ਪ੍ਰਕਾਸ਼ ਦੀ ਮਾਇਆ ਵੀ ਇੱਕ ਪ੍ਰਕਾਸ਼ ਦੀ ਮਾਇਆ ਹੈ ਅਨੰਤ ਪ੍ਰਕਾਸ਼ ਦੀ ਮਾਇਆ ਹੈ ਅਨੰਤ ਪ੍ਰਕਾਸ਼ ਦੀ ਇਹਦੀ ਇੱਛਾ ਨੇ ਜਿਹੜੀ ਛਾਪੂਰੀ ਹੁੰਦੀ ਹੈ ਉੱਥੇ ਖੁਸ਼ੀ ਬਣਾਂਦਾ بڑے ਸੁਖ ਨੇ ਪਰ ਛੋਟੇ ਛੋਟੇ ਚਾਜਦੇ ਸੁਖ ਨੇ ਹਲਕ ਸੁਖ ਨੇ ਜੜਕਰ ਬੰਦੇ ਅਤ ਕੈਲ ਮਾਇ ਰੰਗ ਰਸਾ ਰਸ ਪ੍ਰਲਤ ਦਾ ਆਇਆ ਰਸ ਜੜਕਰ ਮੰਨੇ ਮਨੇ ਪ੍ਰਤੀਤ ਕਾਲ ਨਾਵੇ ਮੁੜੇ ਜੀਤ ਕਾਲ ਨਾਵੇ ਮੁੜੇ ਜੀਤ ਜੜਕਰ ਬੰਦੇ ਮਨੇ ਪ੍ਰਤੀਤ ਆਰਤੋ ਸੈਰੂ ਜੜਕਾ ਸੇ ਮੰਨੇ ਆਇਆ ਪੂਰੀ ਪਰਚੀ ਦਿਨ ਪੂਰੀ ਪਰਚੀ ਇਤਨਾ ਆਂੰਦਰਾ ਸ਼ਾਵਾ ਜੀ ਬੋਲੀ ਗੱਤ ਵਾ ਉਹ ਨਾਂ ਨੂੰ ਵੀ ਸਰ ਅਹ ਤਨੇ ਕਾਰਨਾ ਮੂੜੇ ਜੀ ਨਾਲ ਆਵੇ ਮੂੜੇ ਜਿੱਤ ਬੋਲੂ ਪੂਰੇ ਕੋ ਲੈ ਆਇਆ ਮੰਨੀ ਵੱਡਾ ਵੀ ਠੀਕ ਹੈ ਇੱਥੇ ਹੀ ਰਹਿਣਾ ਪਾ ਜੇ ਜੇ ਜੇ ਸਮਾਂ ਰਹਿਣਾ ਸਮਾਗਦੀ ਬਜ਼ਾਰ ਸਮਝਦਾ ਪਈਆ ਦਿੱਤਾ ਜਿਹੜਾ ਇਹ ਚ ਕੁਝ ਨਹੀਂ ਵੀ ਰੋਜ ਆਪਰੇ ਦੁਨਿਬੀ ਬਰਲਾ ਹੋ ਗਿਆ ਹਾਂ ਵਿਰੋਧ ਕਾਮ ਕ੍ਰੋਧ ਭੋਗ ਵਿਰੋਧ ਕਾਮ ਕ੍ਰੋਧ ਮਾਧ ਗ੍ਰੋਧ ਦਰ ਵਿੱਚ ਕਾਮ ਇੱਛਾ ਮਨ ਕ੍ਰੋਧ ਝੂਠ ਬਸਾਰ ਇਹ ਦੇ ਵਿੱਚ ਕੇਲ ਕਰਦਾ ਆ ਕੁਝ ਕਰਦਾ ਹੋਇਆ ਕੇਲ ਕਰਦਾ ਬੈਰ ਵਿਰੋਧ ਕਾਮ ਕ੍ਰੋਧ ਮੋ ਛੂਟ ਵਿਕਾਰ ਕੇਲ ਕਰਦਾ ਹੈ ਸਾਡੇ ਜਿਹੜਾ ਦੁਸ਼ਮਣ ਦਾ ਨਸਾਨ ਹੋ ਗਿਆ ਉਹ ਜੀਵਨ ਨਾਲ ਕੇਲ ਹੋ ਜਾਂਦਾ ਠੀਕ ਹੈ ਹੁਣ ਆਇਆ ਫਿਰ ਉੜ ਪਾ ਕੇਲ ਕਰਦਾ ਜਿਹਦੇ ਸੱਜਣ ਪਿੱਛੇ ਦਾ ਫਾਇਦਾ ਹੋ ਜਾਂਦਾ ਖੁਸ਼ੀ ਕਰਦਾ ਆਪਣਾ ਫਾਇਦਾ ਖੁਸ਼ੀ ਕਰਦਾ ਇਹ ਕੇਲੇ ਆਨੰਦੀ ਦਾ ਸਮਝਦਾ ਇਹ ਮਨੁੱਖਾਂ ਦੇ ਕੇਲੇ ਦੀ ਪਾਇਦਾਰੀ ਹਾਂਜੀ ਜੁਗਤੀ ਬਿਹਾਨੇ ਕਈ ਜਨਮ ਤੇ ਆਉਂ ਜੁਗਤੀ ਜੇ ਇਸੇ ਤਰੀਕੇ ਨਾਲ ਸੰਸਾਰ ਬੈਰਬੋਦ ਦੇ ਵਿੱਚ ਬੈਰਬੋਦ ਕੰਪਲੋਡ ਲੋਬੋ ਉਡਵਕਾਰ ਬਣਾ ਲੋਤ ਰਹੋ ਤਰੋ ਅਧੁਨੀ ਸਾਰੇ ਔਗਣਾਂ ਦੇ ਧਰੋ ਜਾਂਦਾ ਹੁੰਦਾ ਸਾਰੇ ਔਗਣ ਦੀ ਹਾਜ਼ਰੀ ਤੇ ਧਰੋ ਨਿਕਲਦਾ ਜਾ ਕੇ ਆਖਰ ਤੇ ਹੋਵੇ ਜਿਹੜੇ ਸਿੱਖੀ ਨੂੰ ਧਰੋ ਕਰਦਾ ਨੇ ਸਾਰੇ ਹੀ ਦੇ ਦੂਰ ਵਿਸ਼ਵਾਸ ਕਰ ਸਰਕਮਾਂ ਦੇ ਕਾਲਕ ਕਰਕੇ ਵਿਸ਼ਵਾਸ ਕਰਦੇ ਧਰੋ ਜੀ ਕਿ ਜਿਹੜਾ ਮੇਵਾਈਲਾਗਾ ਪ੍ਰਚਾਰ ਦੇ ਕੋਲ ਕਮਜਾ ਕੱਲ ਪਚਾਹ ਦੇ ਵਿਰੋਧ ਕਰਦ ਸੱਜਰ ਹੋਆ ਸਾਰੇ ਉਕਰੰ ਦੇ ਅਫੀਲ ਲਾਓ ਦਾ ਸਭ ਤੋਂ ਵੱਡੀ ਸਜ਼ਾ ਕਰੋ ਜੀ ਬੁੱਧੀ ਨੂੰ ਹਿੰਦੂਵਾਦ ਕਿਸੇ ਤੋਂ ਸੋ ਸਭ ਤੋਂ ਵੱਡੀ ਸਜ਼ਾ ਸਭ ਤੋਂ ਵੱਡਾ ਉਕਰੰ ਸਭ ਤੋਂ ਵੱਡੀ ਸਜ਼ਾ ਦੇ ਦਿੱਤੀ ਤੋ ਕੌਣ ਜੀ ਆਇਆ ਨਾ ਤਰਕੀ ਖਦਾਰ ਜੀ ਰਵਾਇਤ ਉਹਨੇ ਜਿਹੜੇ ਓਗਣ ਦੀ ਭੋਜ ਨਵੇਗ ਦੀ ਉਹ ਆਦੇਸਰ ਹੋਇਆ ਹੈ ਰੋਇਆ ਹੈ ਇਹ ਲੈ ਜਿੱਦੇ ਪਾਸ ਕੱਲ ਨੂੰ ਚਲੀ ਜੀ ਪੁੱਛ ਲਈ ਉਹ ਵੀ ਪੁੱਛ ਲਈ ਅਤੁੱਰਾਂ ਨੂੰ ਪਤਾ ਪਿਆ ਆ ਕਿ ਇਹ ਕਿਹੜਾ ਫਲ ਹੋਵੇਗਾ ਕਿਹੜਾ ਫਲ ਹੋਵੇਗਾ ਵੀ ਕਿਹੜੇ ਫਲ ਹੋ ਰਹੇ ਸੀ ਸਰਵਰ ਸਿੰਘ ਹੁਣ ਆਉਣਾ ਜਿਹੜਾ ਸੀਰਵਰਤਾ ਜੀ ਨੇ ਜਿਹੜਾ ਦਾ ਚੈੱਕ ਕੀਤਾ ਬੱਸ ਦੇ ਗੇਸ ਮੁੰਡਾ या वैर क्रोध काम क्रोध मोह चोट विकार महा लोभ तो याहू जुगते बहाने के महा लोभ तो महा लोभ पहला आ गया एक महा लोभ आओ महा लोभ ਕਟਾਈ ਲੋਭੀ ਹੋਵੇ ਗੁਰੂ ਦੀ ਕੋਲ ਕਿਸੇ ਨਹੀਂ ਹੱਥ ਪਾਊਗਾ। ਦਰੂਣ ਉਹ ਤਾਂ ਦਰੂਣ ਕੋਲੋਂ ਕਟਾਈ ਹੋਊ। ਜਿਹੜਾ ਗੁਰੂ ਦੀ ਕੋਲ ਕਦਾ ਖਾਬਦ ਤੱਕ ਨਹੀਂ ਹੋਣਾ ਲੋਕ। ਤੁਸ ਦਾ ਜਦੋਂ ਆਦਾ। ਜੀ ਕੁਛ ਨਹੀਂ। ਤੁਸ। ਸਾਨੂੰ ਦਾ ਨਾ ਕਿਦਾ। ਯਕੀਨ ਇਹਦਾ ਉਹਦਾ। ਬਾਹ ਲੋਭ ਜਾਗ ਜਬ ਵਿਸ਼ਵਾਸ ਕਰੇ ਲੋਭ ਖਾਤਰ ਵਿਸ਼ਵਾਸ ਦਾ ਹੱਥ ਇਹ ਕਰਿਆ ਕਰੇ ਲੋਭ ਖਾਤਰ ਕਰੇ ਜੇ ਗਲਤ ਪ੍ਰਚਾਰ ਦਾ ਕਾਰਨ ਤਾਂ ਗੋਲ ਆਉਂਦੀ ਕੋਲ ਖਾਤਰ ਧੋਪੀਦਾ ਕਿਛੇ ਬਾਹ ਲੋਭੇ ਬਾਹ ਲੋਭ ਦੇ ਬਣਾ ਧੋੜੀ ਕਰਦਾ ਮਹਾਂ ਲੋਗ ਦਾ ਕੁਛ ਤਾਂ ਕੁੰਡਾ ਵੀ ਨਾ ਕੁਝ ਸਮਝਾ ਮਹਾਂ ਲੋਗ ਬੋਜਿਆ ਨਾ ਜੀ ਮਹਾਂ ਲੋਗ ਨਾ ਬੋਲ ਮਹਾਂ ਲੋਗ ਤੋਂ ਨਾ ਨਾ ਕਲੇਦਰੋ ਕਲੇਦਰੋ ਸੋਲ ਬੋਲ ਦੁਆ ਲੋਗ ਤੋਂ ਹੋਣੀ ਹੀ ਹੋ ਗਏ ਸੱਜਣ ਬਿਚਾਉਂਦਾ 50 ਦਾ ਪੈਸਾ ਮਾਰਦਾ 24 ਦੀ ਥੋੜੀ ਆ ਲੈ ਕਦੇ ਨਹੀਂ ਦੀ ਲੈ ਕੇ ਜਾਣੀ ਜਿੱਤ ਰੋਏ ਬਹੁਤ ਦਿੱਕਤਾਂ ਦਾ ਦਿਤਰ ਹੋਇਆ ਲੋਕ ਤਾਂ ਆਪਣਾ ਤਾਂ ਉਹ ਗੱਲ ਲੱਗਦਾ ਲੋਕ ਜਿਹੜਾ ਦੇਸ਼ ਦੇ ਲੋਕਾਂ ਦੇ ਨਾਮ ਹੋਰ ਗੱਲ ਹੈ ਜਿਹੜਾ ਜਿਆਦਾ ਕੰਮ ਕਰਦਾ ਕਈ ਆਦਮੀ ਆਪਣੇ ওভারਡਿਊ ਕੰਮ ਕਰਦੇ ਨੇ ওভার ਟਾਈਮ ਲੋਭੀ ਹੈ ਉੱਤਾਂ ਖਰਚ ਕਰਦਾ ਉਹ ਵੀ ਉਹਨੂੰ ਵੀ ਕਹਿੰਦੇ ਲੋਭੀ ਹੈ ਉਹ ਗੱਲ ਹੋਰ ਹੈ ਅੰਦੇ ਨੇ ਮੂਨਾ ਮਾਰਦਾ ਪਰ ਹੱਡੀ ਨਾਲ ਨੇ ਥੱਲੇ ਯਾ ਯੇ ਯਾ ਤਰਵਾ ਚਾ ਤਰਵਾ ਆਪੀ ਕਰਦਾ ਰੋ ਵਿਸ਼ਵਾਸ ਦਾ ਹੱਥ ਕਰਦਾ ਉਹ ਫਿਰ ਲੋਕ ਦੀ ਹੱਦ ਹੁੰਦੀ ਬਹੁਤ ਬੜੀ ਗੱਲ ਬਹੁਤ ਔਖਾ ਹੱਥ ਪਹੁੰਚਦਾ ਨਾ ਹੋ ਪਤਾ ਲੱਗ ਜਾ ਪਤਾ ਵੀ ਨਹੀਂ ਕਿੰਨੀ ਵੱਡੀ ਗੱਲ ਕਿੰਨੀ ਰਾਮੀ ਹੈ ਇਹ ਪਤਾ ਉਦੋਂ ਤੇ ਬੋਲ ਬਹੁਤ ਬੰਦਾ ਯਾਰ ਕਹਤਾ ਪੁਰੂ ਪੁੱਛਿਆ ਗਾੜੀ ਇਹਦੇ ਨਾਲ ਆਪ ਦਾ ਨਾਮ ਪਤਾ ਲੰਝੂ ਕਿਆ ਸਰਦਾਰ ਕਥਾ ਸਪਰਾ ਸੁਣੂ ਸਰ ਆਤ ਰਿਹਾ ਹੋ ਉਹ ਕੇ ਅੰਦਰ ਕੀ ਜਾਂ ਤਾਂ ਭਲੇ ਬੁਰੇ ਕੀ ਪਿਛਲ ਤੇ ਗੱਲਾਂ ਸੁਣ ਕੇ ਫੇਤਰ ਕਰਦਾ ਬਹੁਤ ਔਖਾ ਹੈ ਉੱਚਾ ਕਲਾ ਗਵਾਦੀ ਲੋੜ ਹੈ ਨਾ ਇਹ ਪਤਾ ਗਵਾਦੀ ਲੋੜੀ ਚੋ ਕਹਾਂਦਾ ਪਰ ਤੋ ਕਾ え ਕਰਦਾ ਹੌਸਲਾ ਕਰ ਲੈਦਾ ਸਾਦਾ ਉਹ ਸੇ ਗਾਥੀ ਕਿਉਂ ਗੇ ਰਹਿਦਾ ਹੌਸਲਾ ਹੋਰ ਨੂੰ ਦਾ ਕਾ ਕਬੀ ਕਾਇਦਾ ਬਾੜੇ ਆਗਿ ਦੇ ਜੱਖਾ ਮਾਅ ਲੜੇ ਹਾਂਜੀ ਇਹ ਹੂ ਜੁਗਤੀ ਬਿਹਾਣੇ ਕੇ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕੇ ਆਉ ਵੀ ਮਨ ਸਭ ਤਰੋ ਐ ਸੱਚ ਅੱਜ ਦੇ ਖਲਾਫ ਹੋਣੀ ਦਾ ਮਤਲਬ ਚੌਧਰ ਹੋ। ਕਾਲੇ ਖਤਰੇ ਬਾਣੇ ਵਾਸਤੇ। ਚੌਧਰ ਵਾਸਤੇ। ਜਿਹੜੇ ਹੁਣ ਗੁਰਮਤਿ ਪ੍ਰਗਟ ਹੋ ਕੇ ਬਾਦਵੀ ਖੜੇ ਦੇ। ਉਹ ਤਾਂ ਹੋ ਹੁਣ ਹੋਤਰ ਉਹ ਜਿਹਾ ਜਿਹਾ ਹੁਣ ਸੰਜੀ ਪੁੱਲ ਚੋਕ। ਹੂੰ। ਉਹ ਪਾ। ਪੁੱਲ ਹੈ। ਸਰੋਬ ਆ ਵੀ। ਉਸ ਤੋਂ ਨਾ ਵਾਪਸ ਹੋ ਗਏ ਨਾ ਹੋਵੇ ਦਬੇ ਚੋਦੀ ਮਾਫੀ ਤਾਂ ਇਹ ਹੈ ਵੀ ਭਾਈ ਹੁਣ ਤੋਂ ਜਿਹੜਾ ਗਲਿਆ ਹੋਇਆ ਹੈ ਉਹ ਫੜ ਉਹਦੀ ਕੀਮਤ ਇਹੋ ਠੀਕ ਤਾਂ ਹੋਏਗੀ ਜਦੋਂ ਤੱਕ ਨਾ ਕੋਈ ਦੀ ਫੇਰ ਆਈਆਂ ਤੈਨੂੰ ਸਰਦ ਤੇ ਮਿੱਟੀ ਚ ਖਾਦ ਬਣ ਕੇ ਫੇਰ ਅੱਜ ਬਣਾ ਕੁਆਤਾ ਮਿੱਟੀ ਵਾਲੇ ਹੋਣਾ ਮਿੱਟੀ ਜੋ ਬਣਾਵਾਲੇ ਚੁੱਪ ਟੀਜੇ ਬਣਾਉਂ ਨਾ ਹੋਪਾ ਅੱਜ ਇਹ ਹੋ ਗੂ ਪਰ ਪ੍ਰਤੀਗਿਵਰ ਨੂੰ ਗੋ ਪੂਰਾ ਸਹਾਇਕਨ ਲਈ ਜੈ ਜੋ ਉਹਨੇ ਪ੍ਰਸਤੁਤ ਹੈ ਸਹਾਇਕਾ ਕਹੇ ਲੋ ਉਹ ਕਰ ਕੋ ਚੱਲੋ ਕੋਈ ਕੋਈ ਤਰੀਕਾ ਨਹੀਂ ਹੈਗਾ ਚਲੋ ਭਾਈ ਫੇਰਾ ਜੀ ਫੇਰੀਓਗਾ ਪੀਆ ਇੱਥੋਂ ਹੋਇਆ ਆਈ ਤਰੀਕਾ ਲੈ ਫੇਰਾ ਹੋ ਗਿਆ ਤੇ ਅਚਾਨਕ ਉਹ ਇਹਦੇ ਪੇੜ ਦੇ ਕੋਲੇ ਤੇਰੀ ਬਿੱਟੀ ਸੜ ਜਾਣਗੇ ਇਹ ਸਾਡੀ ਜ਼ਿੰਮੇਵਾਰੀ ਹੈ ਤੇਰੀ ਬਿੱਟੀ ਹੋਏ ਜੇ ਜਗਾ ਪਜਾਦਾਂਗੇ ਤੇ ਸੱਚਤ ਕੋ ਹੋ ਜਾਈ ਚਲੋ ਬੰਦੋ ਮੇਰੀ ਤੇ ਇੱਛਾ ਇੱਛਾਪੂਰਕ ਸਭ ਨੂੰ ਸੁਖ ਦਤਾ ਹੈ ਕੋਈ ਵਜ੍ਹਾ ਕੰਮ ਤੇ ਸਾਕੇ ਬਸਿਕ ਹੈ ਜਿਗਰਾ ਹੀ ਦਬਾਣਾ ਕੰਮ ਪੂਰੀ ਕਾਬ ਕਾਬ ਦੇ ਦੇ ਸਾਰੇ ਹੋਰ ਵੀ ਕੱਬੇ ਬੈਠੇ ਲਗਾ ਰਹੇ ਨੇ ਆਹ ਜਾਂਦੇ ਸਭ ਕੁਝ ਚੁੱਪ ਚੁੱਪ ਬੜਾ ਜੇਸ ਫੋਟ ਹੋ ਗਿਆ ਅਗਲੀ ਵਾਰ ਨੇਗਰੇ ਇਲੈਕਸ਼ਨ ਲੜਾਂਗੇ ਕੋਤਵਾਰਾ ਪਤਾ ਲੱਗਾ ਨਾ ਕਿ ਸਭ ਕੋ ਆਪਣੇ ਵਾਲਾ ਚੱਕ ਕੇ ਉੱਥੇ ਦੇਣ ਲੱਗੇ ਉਹ ਦਨਗੇ ਸੇ ਜਾਣ ਤੇ ਕੀ ਹੋਊਗਾ ਕੀ ਹੋਊਗਾ ਇਹ ਰਹਾ ਲ ਅੱਗੇ ਵਾਲਾਂ ਕੰਪਨੀ ਉਹਨਾਂ ਨੂੰ ਕਿ ਸਾਡੇ ਨਾਲ ਗੱਲਬਾਤ ਹੋਣ ਚਾਹੀਦੀ ਜਿਹਨੂੰ ਬੋਟਾ ਦੇ ਦਿੱਤਾ ਉਹ ਸੋਹਣੇ ਬੋਲੇ ਦੇਣਾ ਹੂੰ ਹੂੰ ਚਾਰ ਨਹੀਂ ਪਤਾ ਮੈਨੂੰ ਇਹ ਆ ਗਿਆ ਉਹਨਾਂ ਕਰ ਰਿਹਾ ਉਹਨਾਂ ਨੇ ਸਾਡੇ ਕੋਲ ਆ ਜਾਣਾ ਸੀ ਵੀ ਠੀਕ ਹੈ ਆਪੇ ਸੁਨੇਹੇ ਕਰਦੇ ਆਪੇ ਸੁਨੇਹੇ ਕਰਦੇ کئی ਵਾਰ ਦਾ ਬਲੇ ਬਲੇ ਤੋਂ ਆਉਂਦਾ ਉਹ ਮਰੀਆਂ ਕਿਆ ਬੰਦੇ ਨੇ ਮੇਰੇ ਬੰਦੇ ਨੇ ਇਹ ਹਉ ਜੁਗਤੀ ਬਿਹਾਣੇ ਕਈ ਜਨਮ ਹਉ ਜੁਗਤੀ ਕਈ ਜਨਮ ਨਾਂਗੇ ਤੇਰੇ ਤੇਣੀ ਐਸ ਕਿਉ ਕੀਤਾ ਸੁਨਰ ਬੇਗਾ ਬੰਦਾ ਕਰ ਤੇ سزا ਕਟੇ ਮੈਂ ਜੇੜ ਜਨਮ ਤੇ ਭੈਉੀ ਕੋ ਪਰਬਤ ਇਹ ਉਹ ਜੁਗਤੀ ਵੀ ਹਮਨੇ ਕਈ ਜਦੋਂ ਬੁਰਾ ਬਸ ਜਿਹੜਾ ਚਲੋ ਨਾ ਹੋ ਮਦ ਗਿਆ ਕਬੀਰ ਮੰਦ ਗਿਆ ਨਾ ਨੰਦ ਗਿਆ ਦੋਆ ਨੂੰ ਯਾ ਦੱਸਿਆ ਉਹ ਕਹਿੰਦੋ ਬਦੇ ਤਰ ਉਹ ਉਹ ਤੋਂ ਬਾਅਦ ਉਹ ਸੇ ਮਾਤੇ ਖੜੇ ਰਹਿਣ ਰਸਤਾਨਾ ਬਰਨਾ ਦੋ ਅਗਰ ਸਤਿਨਾਮ ਸਤਨਾਮ ਅਮਨੰਦ ਨੇ ਜੀਵਨ ਹੋਣੇ ਆਹ ਰਮਨੰਦ ਅਮਨੰਦ ਨਾ ਬੋਲਣਾ ਦੋ ਕੋਈ ਬਣੀ ਗਿਆ ਆਸ ਬਧੀ ਮਿਲ ਗਿਆ ਓਹ ਕੋ ਫੋਲਜੀ ਦੀ ਮਾਫੀ ਜੀ ਉਹ ਕੋਲੇ ਚੋ ਕੀ ਹੋਇਆ ਜੀ ਉਹ ਦੁਨਲੀ ਕੋਲ ਚੁੱਕਾ ਮੈਂ ਆਪਣੇ ਬੁਧੇ ਆਨੀ ਆ ਵਹਾਂ ਤੇ ਜਾ ਕੇ ਜਰਾਮਾ ਹੋਇਆ ਹੈ ਗੁਰ ਬ੍ਰਹਮਤਾ ਉਹ ਮਨੇ ਕੋਇ ਵੀ ਮਨੇ ਮਾਹੇ ਜੀ ਬੋਲੋ ਨੇ ਬਸ ਅਸੱत्य ਪਹਿਲਾਂ بتایا ਤਾਂ ਫਿਰ ਦਿਖਾਇਆ ਕੁਝ ਨਹੀਂ بتایا ਤਾਂ ਪਹਿਣਾ ਉਹ ਦਿਖਾਇਆਰ ਬਤਾਇਜ ਫਿਰ ਲੋਕ ਬਤਾਉਂਦੇ ਨੇ ਤਾਂ ਖੋਦਾ ਨਹੀਂ ਕੋਈ ਫਿਰ ਦਰਸ਼ਨ ਦੇਖ ਜੀਵ ਉਹ ਬੋਲਦਾ ਪਤਾਉਣਾ ਤੇ ਹੋਣੇ ਸਾਰੇ ਨੇ ਤਾਂ ਖੋਦਾ ਕੋਈ ਇਹ ਨਾਲੇ ਦੇਖ ਕੇ ਦਿਖਾਇਆ ਸਿੱਖਿਆ ਤਾਂ ਤਖਾਇਆ ਅਸੀਂ ਸੁਭਜਣੇ ਬੁੱਝਣੇ ਆਇਆ ਆਪਾਂ ਦਾ ਬੁੱਝਣਾ ਇਹ ਆ ਮਾਰਨੋ ਵੀ ਆ ਪਿੱਛੋਂ ਹੋਣਾ ਸੀ ਬੜਾ ਚਾਹੇ ਮੈਂ ਤਾਂ ਤੇਰਾ ਹੁਕਮ ਆਇਆ ਉਹ ਬਹੁਤ ਗੋਰਦ ਬਣਾਈ ਤਾਂ ਇਹ ਆ ਗਿਆ ਪੂਰੇ ਹੋ ਗਿਆ ਸੈਦਾ ਵੀ ਪੈ ਗਿਆ ਪਿੱਛੇ ਉਹ ਜਾ ਲਾਲ ਪੀਲਾ ਜਾ ਪਾਣੀ ਆਇਆ ਹੋਗਾ ਚਲੇ ਗਿਆ ਹਾਂਜੀ ਤੇ ਆਹੋ ਯੁਕਤੀ ਬਿਹਾਨੇ ਜਨਮ ਨਾਮਿਕ ਰਾਖ ਲਿਓ ਆਪਣ ਕਰ ਕਰ ਤੇ ਆਹੋ ਜੁਗ ਤਾਂ ਕਹਿੰਦਾ ਕਿ ਜਨ ਨੰਗੇ ਕੰਮ ਚ ਨਾਮਿਕ ਰਾਖ ਲਿਓ ਆਪਣ ਕਰ ਕਰ ਬੋਲਦਾ ਨਾ ਨਾਨਕ ਕਹਿੰਦਾ ਕਿਰਪਾ ਸਾਡੇ ਰੱਖ ਸਾਨੂੰ ਕਿਰਪਾ ਸਾਡੇ ਤੇ ਕਰ ਰਾਖ ਲਿਓ ਆਪਣ ਕਰ ਕਰਨ ਦਾ ਮਤਲਬ ਹੈ ਜੇ ਕੋਈ ਕਹੂਗਾ ਤੂੰ ਕਿਰਪਾ ਕਰ ਤੇ ਰੱਖ ਲੈ ਉਹ ਹੀ ਰੱਖ ਬਾਕੀ ਗੱਲ ਤੇ ਹੋ ਜੇ ਨਾ ਲਿਓ ਆਪਣ ਕਰ ਕਰ ਕਹਿੰਦੇ ਉਹ ਨਾਲ ਜਲਦੀ ਬਤਾਇਆ ਜਾ ਸਕਦਾ ਹੈ ਫਿਰ ਤੁਸੀਂ ਆਪਣੇ ਦਬਤੇ ਬੇਚਿੰਤ ਕਰ ਪੱਥਰ ਪਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਦੀ ਵੀਰਤੀ ਕਰੇ ਲਾ ਲਓ ਆਪਣਾ ਦੇ ਬਾਅਦ ਅੰਨ ਜਾ ਰਹੀ ਹੈ ਚੋਰ ਆਪਣੀ ਤਰਫਾ ਤਰੱਕੀ ਅਗੇ ਕਰੂ